ਗੁਰੂ ਨਾਨਕ ਦੇਵ ਸੰਸਾਰ ਵਿੱਚ ਆਏ ਨੇ ਕਲ ਯੁਗ ਦੇ ਪਹਿਲੇ ਰਈਬਰ ਸੰਸਾਰ ਦੇ ਮੰਨੇ ਨੇ ਮਹਾਪੁਰਸ਼ਾਂ ਨੇ ਤੇ ਜਦੋਂ ਆਏ ਤੇ ਉਹਨਾਂ ਨੇ ਕੁਛ ਪੁਰਾਣੀ ਮਰਜ਼ਾਦਾ ਦੇ ਵਿੱਚ ਕੁਛ ਵਾਧਾ ਕੀਤਾ ਤੇ ਮਰਜ਼ਾਦਾ ਬਦਲ ਦਿੱਤੀ ਗੁਰੂ ਤੇ ਸਿੱਖ ਦੀ ਪਰੰਪਰਾ ਨੂੰ ਚਲਾਉਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਤੇ ਇਹਨਾਂ ਨੇ ਜਿੱਥੇ ਵੀ ਨਜ਼ਰ ਪਈ ਉੱਥੇ ਕਮਾਲ ਹੀ ਕਮਾਲ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਸੇ ਕਵਿਨੇ ਲਿਖਿਆ ਨਾਨਕ ਕੀ ਨਜ਼ਰੋਂ ਮੇ ਨਜ਼ਰ ਹੈ ਇਲਾਹੀ ਹੈ ਦਸਤੇ ਮੁਬਾਰਕ ਮੇ ਉਨਕੇ ਖੁਦਾਈ ਕਾਨੋਂ ਮੇ ਉਨਕੇ ਗਰੀਬੋਂ ਕੀ ਚੀਖੇ ਦਿਲ ਮੇ ਦਰਦ ਹੈ ਜਵਾਬੇ ਸਚਾਈ ਹਰ ਜਾਂ ਵਰਗੇ ਗੁਲ ਮੇ ਨਾਨਕ ਕੀ ਹਰ ਸੁਬੂ ਹੈ ਹਰ ਜਗ੍ਹਾ ਹਰ ਅੱਖ ਮੇ ਨਾਨਕ ਕੀ ਜੁਸਤ ਜੂ ਹੈ ਸੂਰਜਵਾ ਚਾਂਦ ਤਾਰੇ ਰੋਸ਼ਨ ਹੈ ਨਾਨਕ ਨੂਰ ਹਰ ਜਗ੍ਹਾ ਹਰ ਕਾਨ ਮੇ ਨਾਨਕ ਕੀ ਗੁਫਤਗੂ ਹੈ ਕਹਿੰਦਾ ਨਾ ਪੰਡਤ ਕਾ ਪ੍ਰੇਮੀ ਹੈ ਵੋ ਨਾ ਮੀਆਂ ਪੇ ਮਿਹਰਬਾਨ ਹੈ ਜੰਨੂ ਤੇਲਕ ਲਗਾਤਾ ਨਹੀਂ ਨਾ ਉਹ ਮੁਸਲਮਾਨ ਹੈ ਸੂਰਤੇ ਉਲਫਤ ਹੈ ਉਲਫਤ ਉਸਕਾ ਮਜ਼ਬ ਹੈ ਉਲਫਤ ਸੇ ਮਿਲਤਾ ਹੈ ਕਿਉਂਕਿ ਉਹ ਹੁਕਮਰਾਨ ਹੈ ਸਤਗੁਰੂ ਹੁਕਮਰਾਨ ਬਣ ਕੇ ਆਉਂਦੇ ਨੇ ਸੰਸਾਰ ਵਿੱਚ ਕਹਿੰਦੇ ਮਿਲ ਮਿਲਾ ਮਦੀਨੇ ਮੇਂ ਕਿਸੇ ਕੋ ਬਗਦਾਦ ਜਾਤਾ ਮਿਲ ਗਿਆ ਮਿਲਾ ਬਹਿਸ਼ਤੋਂ ਮੇਂ ਕਿਸੇ ਕੋ ਮੱਕੇ ਮੇਂ ਆਤਾ ਮਿਲ ਗਿਆ मिला बनारस में किसी को पत्थर छुड़ाता मिल गया मिला खुदा बन किसी की बिगड़ी बनाता मिल गया ऐसे गुरु नानक देव जी संसार में आए थे अजय छोटी दी अवस्था आए उन दिनों में अजय मज्जा गायियां चारदे सन ਸਾਡੇ ਹਿੰਦੁਸਤਾਨ ਦੇ ਪੈਗੰਬਰਾਂ ਨੇ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਵਿੱਚ ਬਚਪਨ ਵਿੱਚ ਇਹ ਕੰਮ ਕੀਤੇ ਨੇ ਆਮ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਗਊਆਂ ਚਾਰਦੇ ਰਹੇ ਗੁਰੂ ਨਾਨਕ ਦੇਵ ਮੱਝੀਆਂ ਚਾਰਦੇ ਰਹੇ ਹਜਰਤ ਮੁਹੰਮਦ ਪੇਟ ਬੱਕਰੀਆਂ ਚਾਰਦੇ ਰਹੇ 20 ਸਾਲ ਦੀ ਉਮਰ ਵਿੱਚ ਤੱਕਰ ਇਹ ਕੰਮ ਕਰਦੇ ਆ ਮੱਝਾਂ ਗਾਈਆਂ ਚਾਰਦੇ ਹੁੰਦੇ ਸਣ ਤੇ ਇੱਕ ਦਿਨ ਰਜਾ ਦਾ ਮਾਲਕ ਹੁੰਦਾ ਗੁਰੂ ਜਦੋਂ ਵੀ ਆਉਂਦਾ ਗੁਰੂ ਕਿਸੇ ਦੇ ਬਣਾਇਆ ਨਹੀਂ ਬਣਦਾ ਗੁਰੂ ਬਣ ਕੇ ਆਉਂਦਾ ਦਰਗਾਹ ਵਿੱਚੋਂ ਬਣ ਕੇ ਆਏ ਸਣ ਇਹਨਾਂ ਨੂੰ ਅਸੀਂ ਯੁਗਤ ਜੋਗੀ ਕਹਿੰਦੇ ਆ ਯੁਗਤ ਉਹ ਹੁੰਦਾ ਜਿਹੜਾ ਆਪਣੀ ਰੋਸ਼ਨੀ ਆਪ ਲੈ ਕੇ ਆਵੇ ਜਿਸ ਤਰ੍ਹਾਂ ਸੂਰਜ ਹੈ ਸੂਰਜ ਨੇ ਕਿਸੇ ਕੋਲ ਰੋਸ਼ਨੀ ਨਹੀਂ ਲਈ ਸੂਰਜ ਆਪਣੀ ਰੋਸ਼ਨੀ ਆਪ ਲੈ ਕੇ ਆਇਆ ਬਾਕੀ ਤਾਰੇ ਤੇ ਚੰ드ਰਮਾ ਸੂਰਜ ਕੋਲ ਰੋਸ਼ਨੀ ਲੈ ਕੇ ਤੇ ਅੱਗੇ ਰੋਸ਼ਨੀ ਦਿੰਦੇ ਨੇ ਇਹ ਜੁਜਾਨ ਜੋਗੀ ਨੇ ਗੁਰੂ ਨਾਨਕ ਜੀ ਉਜਤ ਜੋਗੀ ਬਣ ਕੇ ਆਏ ਹੋਇਆ ਕਿ ਇੱਕ ਦਿਨ ਰਾਜਾ ਦੇ ਮਾਲਕ ਸਣ ਜੋ ਮੱਜਾਂ ਲੈ ਕੇ ਜਾਂਦੇ ਹੁੰਦੇ ਸਨ ਚਾਰਨ ਤੇ ਇਹਨਾਂ ਨੇ ਸਵੇਰੇ ਉੱਠਣ ਦਾ ਵਿਚਾਰ ਨਾ ਬਣਾਇਆ ਜਿਉਂ ਸੁੱਤੇ ਚਾਦਰ ਤਾਣ ਕੇ ਸੁੱਤਾ ਹੀ ਰਹਿ ਤੇ ਸੂਰਜ ਕਾਫੀ ਚੜ ਕੇ ਆ ਗਿਆ ਮਾਤਾ ਤ੍ਰਿਪਤਾ ਨੇ ਆਵਾਜ਼ ਦਿੱਤੀ ਘਰ ਵਿੱਚ ਨੌਕਰਾਨੀ ਸੀ ਤੁਲਸਾ ਅਬਾਏ ਦਿੱਤੀ ਤુલਸਾ ਹਾਂਜੀ ਮਾਤਾ ਜੀ ਜਰਾ ਨਾਨਕ ਨੂੰ ਜਗਾਈ ਜਾ ਕੇ ਅਜੇ ਤੱਕ ਸੁੱਤਾ ਪਿਆ ਬਾਹਰ ਜਾਣਾ ਸੀ ਪड़ोसੀਆਂ ਦੇ ਬੱਚੇ ਸਾਰੇ ਚਲੇ ਗਏ ਮੱਝਾਂ ਲੈ ਕੇ ਇੰਨੀ ਨੀਂਦਰ ਇਹ ਜਗਾਉਣ ਵਾਸਤੇ ਤੁਰੀ ਹੈ ਇਹ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰਹਿਬਰ ਮੰਨ ਬੈਠੀ ਹੋਈ ਹੈ ਤੇ ਸੋਚਿਆ ਬਣਾ ਉਹ ਐਡੀ ਪਵਿੱਤਰ ਹਸਤੀ ਮੈਂ ਇੱਕ ਅਪਵਿੱਤਰ ਸਰੀਰ ਮੇਰਾ ਮੈਂ ਕਿਸ ਤਰ੍ਹਾਂ ਜਗਾਵਾਂ ਜਾ ਕੇ ਕਹਿੰਦੇ ਨੇ ਤੁਲਸਾ ਨੌਕਰਾਨੀ ਜਾਨੀ ਪ੍ਰੀਤਮ ਹੈ ਗਿਆਨੀ ਧਿਆਨੀ ਕੈਸੇ ਅਬ ਪ੍ਰੇਮ ਕਰ ਪ੍ਰਭੂ ਕੋ ਜਗਾਉ ਮੈਂ ਆਵਾਜ਼ ਦੇ ਬੁਲਾਉ ਜਾਂ ਕੈ ਹੱਥ ਸੇ ਹਿਲਾਉ ਹੱਥ ਹੱਥ ਹੈ ਅਸ਼ੁੱਧ ਹੱਥ ਕੈਸੇ ਕੈ ਲਗਾਉ ਮੈਂ ਹੱਥ ਵੀ ਮੇਰਾ ਅਪਵਿੱਤਰ ਹੈ ਮੈਂ ਆਪਣਾ ਅਪਵਿੱਤਰ ਹੱਥ ਪਵਿੱਤਰ ਹਸਤੀ ਨੂੰ ਕਿਵੇਂ ਲਾ ਦਿਆਂ ਆਖਿਰ ਕੀ ਕੀਤਾ ਖਟੀਆ ਕੇ ਆਸ-ਪਾਸ ਘੁੰਮ ਘੁੰਮ ਕਹਿਣੇ ਲਗੀ ਜਾਗ ਮੇਰੇ ਪ੍ਰਭੂ ਤੋਹੇ ਕਬ ਕੀ ਜਗਾਉ ਮੈਂ ਤੇ ਸੋਚ ਸੋਚ ਸੋਚ ਅੰਤ ਸੋਚ ਸੋਚੀ ਖਾਲਸਾ ਜੀ ਚਰਨੋਂ ਕੇ ਸਾਥ ਜੀਬ ਆਪਣੀ ਕਸਾਉ ਮੈਂ ਵਿਚਾਰ ਕੀਤਾ ਮਨਾ ਇਸ ਤਰ੍ਹਾਂ ਤੇ ਸ਼ਾਇਦ ਨਾ ਉਠਣ ਤੇ ਕਿਉਂ ਨਾ ਇਸ ਤਰ੍ਹਾਂ ਉਠਾਲਿਆ ਜਾਏ ਭਈ ਮੈਂ ਚਰਨ ਚੱਟਣੇ ਸ਼ੁਰੂ ਕਰ ਦਿਆ ਆਪੇ ਉੱਠ ਬੈਣਗੇ ਤੁਲਸਾ ਲੋਕ ਰਣੀ ਪੈਂਦਾਵਲ ਬੈਠੀ ਚਰਨਾ ਬਲ ਚਾਦਰ ਚੁੱਕੀ ਤੇ ਇੱਕ ਸਤਿਗੁਰਾਂ ਦੇ ਗੁਰੂ ਨਾਨਕ ਦੇਵ ਜੀ ਦੇ ਆਪਣੀ ਜ਼ੁਬਾਨ ਦੇ ਨਾਲ ਚਰਨ ਚੱਟਣੇ ਸ਼ੁਰੂ ਕੀਤੇ। ਬਸ ਚਰਨ ਚੱਟਦਿਆਂ ਹੀ ਜਦੋਂ ਸਤਿਗੁਰੂ ਦੀ ਸਤਿਗੁਰੂ ਦੇ ਸਰੀਰ ਨਾਲ ਉਹਨਾਂ ਦੇ ਚਰਨਾਂ ਨਾਲ ਜ਼ੁਬਾਨ ਸਪਰਸ਼ ਹੋਈ ਤੇ ਸਪਰਸ਼ ਕਰਦਿਆਂ ਹੀ ਤਰਕਾਗਦਰਸ਼ੀ ਬਣ ਗਏ। ਕਾਇਆ ਪਲਟ ਗਈ ਮਨ ਬਿਰਤੀ ਬਦਲ ਗਈ دیਵਾਨੀ ਤੇ ਮਸਤਾਨੀ ਹੋ ਗਈ ਕਵੀ ਕਹਿੰਦਾ ਚਰਨ ਬੋਸੇ ਗੁਰੂ ਕੇ ਜਬ ਮੌਲਾ ਕੀ ਮਸਤੀ ਪਾ ਗਈ ਖਾਦਮ ਸੇ ਹੋਈ ਖੁਦਾ ਅਬ ਅੱਲਾਹ ਕੀ ਹਸਤੀ ਪਾ ਗਈ ਮੈਂ ਤੂੰ ਕੇ ਝਗੜੇ ਮਿਟ ਗਏ ਅਬ ਤੂੰ ਤੂੰ ਕਰਤੀ ਤੂੰ ਹੋਈ ਤੂੰ ਖੁਦਾ ਕੇ ਘਰ ਕੀ ਮਹਿੰਗੀ ਸੀ ਸਸਤੀ ਪਾ ਗਈ ਉਹ ਜਿੱਥੇ ਰਿਸ਼ੀ 무ਨੀ ਨਹੀਂ ਪਹੁੰਚ ਸਕਦੇ ਉੱਥੇ 1 ਮਿੰਟ ਵਿੱਚ ਪਹੁੰਚ ਗਈ ਸਿਰਫ ਗੁਰੂ ਕੇ ਚਰਨ ਚੱਟਣ ਕੋ ਸਪਰਸ਼ ਕਰਨ ਤੋਂ ਇੱਕ ਗੁਰਬਾਣੀ ਵਿੱਚ ਪਾਠ ਆਉਂਦਾ ਹੈ ਪਟਾ ਦੇ ਸਵਈਆਂ ਵਿੱਚ ਇਹਨਾਂ ਦੇ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਮੁੱਖ ਰੱਖਿਆ ਜਿਨ੍ਹਾਂ ਨੇ ਸਪਰਸ਼ ਕੀਤਾ ਸਤਿਗੁਰੂ ਨਾਲ ਕਿ ਪਟ ਕਹਿੰਦੇ ਨੇ ਗੁਰ ਅਮਰਦਾਸ ਪਰਸੀ ਹੈ ਬਹੁਮ ਪਾਤਕ ਬਿਨਾਸੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ ਕਹਿੰਦੇ ਨੇ ਉਹਨਾਂ ਨੇ ਜਿੰਨੇ ਵੀ ਧਰਤੀ ਤੇ ਪਾਪ ਕੀਤੇ ਹੋਏ ਸਨ ਸਭ ਨਾਸ਼ ਹੋ ਗਏ ਉਹਨਾਂ ਦੇ ਪਾਪ ਕੱਟੇ ਗਏ ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸ ਹੈ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ ਉਹਨਾਂ ਦੇ ਦਰਸ਼ਨ ਵਾਸਤੇ ਸਿੱਧ ਸਾਧਕ ਜੋਗੀ ॠषि मुनि ਤਰਸਦੇ ਸਣ ਭਈ ਹੀ ਉਹਨਾਂ ਦਾ ਦਰਸ਼ਨ ਕਰੀਏ ਜਾ ਕੇ ਕਹਿੰਦੇ ਨੇ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਪਰਸ ਕੀਤਾ ਚਰਨ ਪਰਸੇ ਕਹਿੰਦੇ ਨੇ ਉਹਨਾਂ ਦਾ ਧਿਆਨ ਜੁੜ ਗਿਆ ਨਾਮ ਨਾਲ ਈਸ਼ਵਰ ਨਾਲ ਧਿਆਨ ਜੁੜ ਗਿਆ ਤੇ ਉਹਨਾਂ ਦਾ ਯੂਨਾ ਵਿੱਚ ਪੈਣਾ ਮੁੱਕ ਗਿਆ ਫੇਰ ਕਹਿੰਦੇ ਨੇ ਗੁਰ ਅਮਰਦਾਸ ਪਰਸੀ ਹੈ ਅਪਹਿ ਲੱਭੈ ਗੋ ਚੁੱਕੈ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੇ ਉਹਨਾਂ ਦਾ ਉਹ ਅਪਹਿ ਪਦਵੀ ਨੂੰ ਦਿਰ ਭੈ ਹੋ ਗਏ ਸੰਸਾਰ ਵਿੱਚ ਤੇ ਆਵਾ ਗਮਨ ਮੁਕ ਗਿਆ ਇਹ ਗੁਰੂ ਕੇ ਚਰਨ ਪਰਸਣ ਦਾ ਲਾਭ ਹੈ ਗੁਰਬਾਣੀ ਵਿੱਚ ਆਇਆ ਸਾਹਿਬ ਦਸਮ ਪਾਤਸ਼ਾਹ ਕਹਿੰਦੇ ਨੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗ ਤੇ ਨਰ ਫੇਰਦਾ ਜੇਹੇ ਧਰਾਂਗੇ ਜਿਨ੍ਹਾਂ ਨੇ ਚਰਨ ਪਰਸਲੇ ਉਨਨ ਅਤੇ ਆਉਣਾ ਜਾਣਾ ਮਿਟ ਗਿਆ ਦੁਬਾਰਾ ਜਨਮ ਮਰਨਾ ਜਨਮ ਮਰਨ ਕੱਟਿਆ ਗਿਆ ਨਾ ਇਸ ਤਰ੍ਹਾਂ ਕਹਿ ਲਈਏ ਮੈਂ ਇਹ ਅਰਜ਼ ਕਰ ਰਿਹਾ ਹਾਂ ਬੜੀ ਪੁਰਾਣੀ ਕਥਾ ਦੁਆਪਰ ਯੁਗ ਦੀ ਭਗਵਾਨ ਕ੍ਰਿਸ਼ਨ ਮਥਰਾ ਦੀਆਂ ਗਲੀ ਵਿੱਚ ਤੁਰੇ ਆ ਰਹੇ ਅੱਗੇ ਇੱਕ ਕੁਬਜਾ ਮਾਲਣ ਤੁਰੇ ਆਉਂਦੀ ਹੈ ਥਾਲ ਦੇ ਵਿੱਚ ਫੁੱਲ ਰੱਖੇ ਹੋਏ ਨੇ ਹਾਰ ਪਰੋ ਕੇ ਰੱਖੇ ਹੋਏ ਨੇ ਲਈ ਜਾਂਦੀ ਹੈ ਕੰਸ ਅਗੋ ਭਗਵਾਨ ਕ੍ਰਿਸ਼ਨ ਮਿਲ ਪਏ ਤੇ ਭਗਵਾਨ ਕ੍ਰਿਸ਼ਨ ਅੱਗੇ ਓਕੇ ਖਲੋ ਗਏ ਪੁੱਛਿਆ ਕੁਬਰੀ ਕਿੱਥੇ ਜਾ ਰਹੀ ਹੈ ਇਹ ਕੁੱਬੀ ਹੋਈ ਹੋਈ ਹੈ ਬਿਲਕੁਲ ਪਤਾ ਨਹੀਂ ਇਹਦਾ ਅਸਲੀ ਨਾਮ ਕੀ ਮਾਤਾ ਪਿਤਾ ਨੇ ਰੱਖਿਆ ਹੋਏਗਾ ਕੁਬਜਾ ਕੁੱਬੀ ਹੋਣ ਤੋਂ ਹੀ ਕੁਬਜਾ ਨਾਮ ਆਇਆ ਪੁੱਛਿਆ ਕੁਬਰੀ ਕਿੱਥੇ ਜਾ ਰਹੀ ਹੈ ਇਹ ਕਹਿੰਦੀ ਹੈ ਕੰਸ ਦੇ ਦਰਬਾਰ ਵਿੱਚ ਚੱਲ ਰਹੀ ਹਾਂ ਅੱਛਾ ਕਾਦੇ ਵਾਸਤੇ ਫੁੱਲ ਲੈ ਕੇ ਜਾਨੀ ਹੁੰਨੀ ਹੈ ਭਗਵਾਨ ਕਹਿੰਦੇ ਫਿਰ ਇੱਕ ਹਾਰ ਮੇਰੇ ਗਲ ਚ ਪਾ ਦੇ ਅੱਜ ਇਹ ਮੰਨਦੀ ਨਹੀਂ ਕਹਿੰਦੀ ਆ ਨਹੀਂ ਉਹਦਾ ਸੁਭਾਅ ਬੜਾ ਸਖਤ ਹੈ ਕੰਸ ਦਾ ਤੇ ਮੈਨੂੰ ਇਹ ਫੁੱਲ ਮੈਂ ਦਿਆ ਵਾ ਤੇ ਤੁਹਾਨੂੰ ਹੋਰ ਲਿਆ ਦਿਆਂਗੀ ਭਗਵਾਨ ਆਖਣ ਲੱਗੇ ਨਹੀਂ ਮੈਂ ਤੇ ਅੱਜ ਇਹ ਹਾਰ ਪਵਾ ਹੀ ਲੈਣਾ ਇਸ ਤਰ੍ਹਾਂ ਮੈਂ ਜਾਣ ਹੀ ਨਹੀਂ ਦੇਣਾ ਅੱਗੇ ਹੋ ਕੇ ਖਲੋਗੇ ਜਿੱਦ ਕਰ ਬੈਠੇ ਇਸ ਨੇ ਇੱਕ ਬਹਾਨਾ ਕੀਤਾ ਕਹਿੰਦੀ ਆ ਮਹਾਰਾਜ ਤੁਸੀਂ ਉੱਚੇ ਬਹੁਤ ਉੱਤੇ ਮੈਂ ਤੇ ਕਿੰਨੀ ਨੀਵੀਂ ਹਾਂ ਤੇ ਮੇਰਾ ਹੱਥ ਨਹੀਂ ਪਹੁੰਚਣਾ ਮੈਂ ਹਾਰ ਪਾਵਾਂ ਕਿਸ ਤਰ੍ਹਾਂ ਤੁਹਾਡੇ ਗਲ ਵਿੱਚ ਉਹ ਕੰਦੇਰੇ ਤੇ ਇਲਾਜ ਕਰ ਲੈਨੇ ਹੁਣ ਸਤਗੁਰੂ ਜਿਹੜੇ ਨੇ ਰਦੀਆਂ ਸਿੱਧੀਆਂ ਦੇ ਮਾਲਕ ਜੋ ਜੀ ਕਰੇ ਕਰਦੇ ਸੰਸਾਰ ਨੂੰ ਕਰਤਾ ਬਣ ਜਾਏ ਹਰਤਾ ਬਣ ਜਾਏ ਸੰਸਾਰ ਦਾ ਬਣ ਸਕਦਾ ਉਹਨਾਂ ਨੇ ਕੀ ਕੀਤਾ ਪੈਰਾਂ ਦੇ ਅੰਗੂਠਿਆਂ ਤੇ ਪੈਰ ਧਰ ਲੇ ਇੱਕ ਸਿਰ ਤੇ ਹੱਥ ਰੱਖਿਆ ਕਿ ਇੱਥੇ ਹੱਥ ਰੱਖ ਕੇ ਖਿੱਚ ਕੇ ਆਪਣੇ ਜਨੂਚੀ ਕਰ ਦਿੱਤਾ ਕੁੱਬ ਕੱਢ ਕੇ ਰੱਖ ਦਿੱਤਾ ਮੇਰਾ ਕੁੱਬ ਨਹੀਂ ਕੱਢਿਆ ਕਹਿੰਦੇ ਨੇ ਜੁਬਾਵਸਥਾ ਕਰ ਦਿੱਤੀ ਕਾਇ ਨਹੀਂ ਪਲਟ ਨਾ ਪਲਟ ਕੇ ਰੱਖ ਦਿੱਤੀ ਭਗਵਾਨ ਕ੍ਰਿਸ਼ਨ ਨੇ ਤੇ ਗੁਰਗੋਬਨ ਸਿੰਘ ਪਾਪਾ ਇਸ ਕਥਾ ਨੂੰ ਲਿਖਦੇ ਨੇ ਦਸਵੰਦ ਦਰਬਾਰ ਵਿੱਚ ਕਹਿੰਦੇ ਨੇ ਭਾਗ ਵੱਡੇ ਤਿਹ ਮਾਲਣ ਕੇ ਹਰ ਕੇ ਤਨ ਕੋ ਜਨ ਹਾਥ ਸੁਹਾਇਓ ਉਹ ਹਾਰ ਪਾਉਣ ਲੱਗੀ ਨੇ ਹੱਥ ਲੱਗ ਗਿਆ ਸਪਰਸ਼ ਕਰ ਲਿਆ ਨਾ ਤੇ ਜਿਸ ਨੇ ਪਰਸ ਲਿਆ ਉਹ ਸੰਸਾਰ ਤੋਂ ਤਰ ਗਿਆ ਇਹ ਹਾਲ ਹੋਇਆ ਇਸ ਤੁਲਸਾ ਨਾਲ ਜਿਸ ਵੇਲੇ ਆਪਣਾ ਆਪ ਭੁੱਲ ਗਿਆ ਵਿੜੇ ਵਿੱਚ ਤੁਰੀ ਫਿਰਦੀ ਐ ਤੇ ਕਹਿੰਦੀ ਐ ਮੈਂ ਨਾਨਕ ਹਾਂ ਮੈਂ ਨਰੰਗਰ ਹਾਂ ਮੈਂ ਹੀ ਕ੍ਰਿਸ਼ਨ ਹਾਂ ਮੈਂ ਰਾਮ ਹਾਂ ਹਰ ਹਰ ਥਾਂ ਤੇ ਇਸ ਤਰ੍ਹਾਂ ਕਰਦੀ ਫਿਰਦੀ ਐ ਮਸਤ ਵਰਤੀ ਹੋ ਗਈ ਮਾਤਾ ਤ੍ਰਿਪਤਾ ਨੇ ਆਵਾਜ਼ ਦਿੱਤੀ ਤੁਰਸਾ ਨਾਨਕ ਨੂੰ ਜਗਾਇਆ ਕਹਿੰਦੀ ਐ ਜੀ ਇਸ ਤਰ੍ਹਾਂ ਐ ਮਾਤਾ ਜੀ ਇਹ ਗੱਲ ਐ ਕਿ ਸੁੱਤੇ ਨੂੰ ਤੇ ਕੋਈ ਜਗਾ ਸਕਦਾ ਪਰ ਜਾਗਦੇ ਨੂੰ ਕੌਣ ਜਗਾ ਸਕਦਾ ਸਤਿਗੁਰੂ ਸੌਂਦੇ ਨਹੀਂ ਆਤਮਿਕ ਤੌਰ ਤੇ ਸਤਗੁਰੂ ਨਹੀਂ ਸੌਂਦੇ ਗੁਰਬਾਣੀ ਕਹਿੰਦੀ ਹੈ ਕਹਿੰਦੇ ਨੇ ਇੱਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਸੰਸਾਰ ਮੋਹ ਦੇ ਵਿੱਚ ਤੇ ਹੋਰ ਕਈਆਂ ਆਸ਼੍ਰੀ ਸੰਪਦਾ ਤੇ ਮਾਇਆ ਦੇ ਪ੍ਰਭਾਵ ਕਰਕੇ ਸੌਂ ਜਾਂਦਾ ਪਰ ਸਤਗੁਰੂ ਨਹੀਂ ਇਸ ਪੱਖ ਤੋਂ ਸੌਂਦੇ ਹਮੇਸ਼ਾ ਜਾਗਦੇ ਨੇ ਕਬੀਰ ਕਹਿੰਦੇ ਨੇ ਕਿਸੇ ਮਾਲਣ ਨੂੰ ਉਪਦੇਸ਼ ਦਿੰਦੇ ਪਏ ਸਨ ਭੂਲੀ ਮਾਲਣੀ ਹੈ ਇਓ ਸਤਗੁਰ ਜਾਗਤਾ ਹੈ ਦਿਓ ਸਤਗੁਰੂ ਤੇ ਹਮੇਸ਼ਾ ਜਾਗਦਾ ਹੈ ਤੂੰ ਇਹ ਕੀ ਕਰਦੀ ਪਈ ਹੈ ਮੈਂ ਅਰਜ ਕਰ ਰਿਹਾ ਸਾਂ ਤੁਲਸਾ ਕਹਿੰਦੀ ਆ ਮਾਤਾ ਜੀ ਗੁਰੂ ਨਾਨਕ ਦੇਵ ਜਿੱਥੇ ਹੀ ਨਹੀਂ ਕਿੱਥੇ ਲੈ ਇਹ ਕਹਿੰਦੀ ਆ ਸੋਏ ਨਹੀਂ ਹੈ ਸਤਗੁਰੂ ਹੈ ਦੂਰ ਕਹੀ ਜਾ ਰਹੇ ਜਿਸ ਜਗ੍ਹਾ ਦਰਿਆ ਕਿਨਾਰੇ ਦੁਖੀ ਦਿਲ ਬੁਲਾ ਰਹੇ ਜਹਾਜ਼ ਬਹਿਤਾ ਜਾ ਰਹਾ ਸਾਗਰ ਮੇ ਕੋਈ ਕਿਸੇ ਕਾ ਤੇ ਕੰਦਾ ਲਾ ਕੇ ਸਤਗੁਰੂ ਜੀ ਹੈ ਕਿਨਾਰੇ ਲਾ ਰਹੇ ਉਤੇ ਇੱਥੇ ਹੀ ਨਹੀਂ ਉਹ ਤੇ ਕਿਸੇ ਦਾ ਜਹਾਜ਼ ਡੁੱਬਦਾ ਜਾ ਰਿਹਾ ਸਿੰਗਲ ਦੀਪ ਵਿੱਚ ਤੇ ਉੱਥੇ ਪਹੁੰਚੇ ਹੋਏ ਤੇ ਉਹ ਜਹਾਜ਼ ਬੰਨੇ ਲਾਰੇ ਨੇ ਇੱਥੇ ਤੇ ਹੈ ਹੀ ਨਹੀਂ ਮੈਂ ਜਗਾਵਾ ਕਿਸ ਨੂੰ ਇੱਥੋਂ ਤੱਕ ਖਬਰਾਂ ਦੇਣ ਲੱਗ ਪਈ ਸਿਰਫ ਚਰਨ ਪਰਸਕੇ ਮੈਂ ਅਰਜ ਕੀਤਾ ਸੀ ਇਹ ਹੈ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਕਬੀਰ ਕਹਿੰਦੇ ਨੇ ਗੁਰ ਲੱਗਾ ਤਬ ਜਾਣੀ ਹੈ ਜੇ ਇਹ ਅਵਸਥਾ ਹੋ ਗਈ ਹੈ ਕਿਸੇ ਦੀ ਸਮਝ ਲਓ ਗੁਰੂ ਵਾਲੇ ਨੇ ਗੁਰੂ ਮਿਲ ਪਿਆ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੋਇਆ ਸੀ ਇੱਕ ਮਾਤਾ ਦਾਨੀ ਹੋਈ ਹੈ ਨਾਮ ਇਤਿਹਾਸ ਵਿੱਚ ਪਿੰਡ ਚੰਬੇ ਦੀ ਤੇ ਬਿਆਸ ਦੇ ਕਿਨਾਰੇ ਤੇ ਪਿੰਡ ਆਲਾਕਾ ਤਰਨਤਾਰਨ ਦਾ ਚੰਬੇ ਦੀ ਇਸ ਨੇ ਦਰਸ਼ਨ ਕੀਤਾ ਆਪਣਾ ਕਿਤੇ ਜਵਾਨੀ ਵਿੱਚ ਜਾ ਕੇ ਸ੍ਰੀ ਭੈਣੀ ਸਾਹਿਬ ਜਾ ਕੇ ਭਜਨ ਪੁੱਛਿਆ ਤੇ ਨਾਮ ਧਾਰੀ ਵਿੱਚ ਆਈ